ब्रह्म ज्ञान की कीर्तन आहे ब्रह्म ज्ञानी कै सगल मन वाले ब्रह्म कहती के कीर्तन आहे माया दे विच माया दे बदले ब्रह्म ज्ञान दे ते कोई ਜਿਹੜੀ ਚੀਜ਼ ਮਾਈ ਆ ਜਿਹਦੇ ਉਹ ਬਣਾਈ ਹੋਈ ਚੀਜ਼ ਨਾ ਬਣਾਉਣ ਵਾਲੇ ਤੇ ਕਿੰਨੇ ਕੁ ਬਣਦੇ ਹਨ ਬਣਾਉਣ ਵਾਲਾ ਜ਼ਿਆਦਾ ਕਿੰਨੇ ਆ ਜੋ ਚੀਜ਼ੋ ਨਾ ਬਣਾਈ ਹੋਇਆ ਬਸ ਕੀ ਬਣਦੀ ਇਸ ਕਰਕੇ ਜਿਹੜੀ ਚੀਜ਼ ਨਾ ਬਣਾਉਂਦੀ ਆ ਨਾ ਹਜ਼ਾਰ ਦਾ ਔਰ ਯਾਰ ਦਾ ਨੋਟ ਵਾਟੇ ਚੀਜ਼ ਦੀ ਮਸਲੀ जो तो बनांदी है अब जानते का करता है कृष्ण और करते भी नहीं पता माया ਨਾਲ किंसों माया तो नहीं पढ़ाई हुई है अगली अगले साल ब्रह्म की कीमत ना है ब्रह्म ज्ञानी के सगल मन माया जो जिन्ने माया है ਪ੍ਰਭੂ ਕਾ ਦੇ ਮਨ ਦੇ ਵਿਚੋਂ ਹੀ ਪੈਦਾ ਹੋਈ ਨੂੰ। ਪਰ ਮਾਇਆ ਸਰਦ ਮਨ ਦੇ ਉਪਜਾ ਅਸਤਿ ਪਰਮੈਸ਼ਰ ਦਾ ਜੋ ਬਾਣਾ ਉਹ ਹੀ ਤਾਂ ਮਾਇਆ ਬਹਰ। ਉਹਦੇ ਮਨ ਦੇ ਵਿਚੋਂ ਹੀ ਪੈਦਾ ਹੋਈ ਹੋਈ ਆ ਮਾਇਆ ਹੈ। ਇਹ ਮਾਇਆ ਉਹਦੀ ਕਲਪਨਾ ਹੈ। ਉਹਦੇ ਮਨ ਦਾ ਪ੍ਰਗਟ ਰੂਪ ਜਿਹੜਾ ਉਹ ਆ ਸ੍ਰਿਸ਼ਟੀ ਆ ਸਾਰੀ। ਪਰਮੇਸ਼ਰ ਦੇ ਉਹ ਬੂਲ ਪਰਪਲ ਉਹਦੀ ਇੱਛਾ ਦੇ ਵਿੱਚ ਜਿਹੜੀ ਇੱਛਾ ਹੈ ਉਹਦਾ ਸਿਸਟੇ ਮੰਦੇ ਬਚਨ ਦਾ ਹੋਈ ਐ ਅੱਛਾ ਫਿਰ ਜਿੱਦਿ ਪੈਦਾ ਕਰਤੀ ਸਮਾਂ ਹੋਰ ਵੀ ਪੈਦਾ ਕਰ ਸਕਦਾ ਕਿਸੇ ਪੈਦਾ ਕਰ ਸਕਦਾ ਕੋਈ ਪਗਾ ਜੀ ਪਰ ਜਿੰਨੇ ਪੈਦਾ ਕਰਤੀ ਉਹਦੇ ਨਾਲ ਜੋ ਜੀਵਤ ਦੀ ਗੱਲ ਹੈ ਜੀ ਸਭ ਕੁਝ ਉਹਨੇ ਜੇਬ ਜੋ ਬੱਡੇ ਬਾਹਰ ਰੱਖਦਾ ਹੋ। ਜੇ ਉਸ ਕਿੰਨਾ ਕੁ ਸਾਇਬ ਨਹੀਂ ਪਤਾ। ਬਾਹਰ ਵਾਲੇ ਵੀ ਆਰ ਉਹ ਬੱਦੇ ਜਿਹੜੀ ਜੇ ਬੱਦੇ ਨਾਲ ਬਾਹਰ ਸਿੱਟੇ ਬਾਹਰ ਰੱਖੇ ਜੀ ਉਹਦੀ ਕੀ ਮੱਤ ਹੈ। ਪੂਰਾ ਜਿਹੜਾ ਅੰਦਰ ਹੈ ਉਹਦਾ ਪੂਰਾ ਬਾਹਰ ਕੱਢਿਆ ਹੋਵੇ। ਸਾਰਾ ਹੀ ਆਪ ਰੱਬ ਵਿਰਾਮ ਗਿਆਨ ਦੇ ਸਗਲ ਮਨ ਮਾਹੀ ਬ੍ਰਹਮ ਕਾਰਨੀ ਦੇ ਸਾਰੇ ਬੁੱਤ ਦੇ ਹੈ ਜੋ ਆਹ ਚੱਲ ਰਿਹਾ ਹੈ ਬਾਹਰ ਨਹੀਂ ਆਉ ਤੇ ਸੁਖ ਸਾਗਰ ਜਿਹੜਾ ਹੈਗਾ ਸੁਖ ਸਾਗਰ ਹੈਗਾ ਸੰਸਾਰ ਦੇ ਵਿਚਈਆ ਸੁਖ ਸਾਗਰ ਵੀ ਕਿਉਂ ਤੁਹਾਨੂੰ ਪੈਰੀ ਗੋ ਸੁਖ ਸਾਗਰ ਸੁਖ ਸਾਗਰ ਦੇ ਕਿੰਨ ਸੁਖਾ ਕਰਨਾ ਹੈ ਕਿਉਂ ਸਾਗਰ ਦੁੱਖੇ ਦੁੱਖਣਾ ਦੁੱਖੇ ਹੋਣਾ ਆਰਾਮ ਜੀਤੇ ਕਿਉਂ ਤੱਕ ਮਨ ਨੂੰ ਰਹਿਣਾ ਭਰਮ ਗਿਆ ਦੀ ਗਾਉਂ ਜਾਣੇ ਭੇਜ ਸੁੱਖਾਂ ਵੱਟੇ ਕੋਈ ਦੁੱਖ ਨਹੀਂ ਖਰੀਦਦਾ ਸੁੱਖਾਂ ਵੱਟੇ ਕੋਈ ਦੁੱਖ ਨਹੀਂ ਤੂਗਾ ਸੁੱਖਾਂ ਵੱਟੇ ਕੋਈ ਦੁੱਖ ਲੈ ਲੂ ਸੁੱਖਾਂ ਲੈਂਦੀ ਏ ਦੁਨੀਆ ਸੁੱਖਾਂ ਵੱਟੇ ਅਸੀਂ ਸੁਖ ਤਾਂ ਲੈ ਸਕਦੇ ਆ ਸੁੱਖਾਂ ਵੱਟੇ ਦੁੱਖ ਨਹੀਂ ਹੋ ਜਨ ਆਇਆ ਦੁੱਖ ਰੂਪ ਹੈ ਫਕਸਾਦਰ ਰੰਗਾਂ ਨਹੀਂ ਸੰਸਾਦਰ ਹੈ ਸਭ ਕਾਹਨੇ ਦੀ ਕੀਮਤ ਉਹ ਸੁਖ ਸਾਗਰ ਦੇ ਕਿਹਨੂੰ ਤੋਂ ਸੁਖ ਸਾਗਰ ਦੇ ਵਿੱਚੋਂ ਪੈ ਸਕਦੀ ਆ ਆ ਗੱਲ ਆ ਸੁਖ ਸਾਗਰ ਦਾ ਘੇੜਾ ਛੜਾਉਨੇ ਉਹਦੇ ਨਾਲ ਦੀ ਕੀਮਤ ਕਮਾ ਭਾਈ ਜਿਹੜੇ ਲੋਕ ਚੜਾਵੇ ਚੜਾਉਂਦੇ ਨੇ بڑے بڑے ਕੀਮਤ ਕੀਮਤ ਪਾਉਂਦੇ ਨੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਖੁਸ਼ ਕਰਨ ਵਾਸਤੇ ਜਿਹੜੀ ਜੀ ਨਾਲ ਜਿਹੜੇ ਦੇਵੀ ਦੇਵਤਾਂ ਖੁਸ਼ ਹੋ ਜਾਂਦੇ ਕੀਮਤ ਭਾਈ ਕੋਈ ਅਫਸਰ ਹੈ ਕੋਈ ਰਾਜਾ ਜਿਹੜੀ ਨਾ ਖੋਜ ਹੋਊਗਾ ਦੇਖਿਓ ਭਾਈ ਉਹ ਅਸਰਾ ਕੱਪ ਨਹੀਂ ਹੁਣ ਕੰਮ ਕਰਾਉਂ ਗਿਆ ਜਿੱਦਿ ਦੇ ਸੇ ਲੋਕ ਉਹ ਦੇਖਿਓ ਭਾਈ ਨਿਕੋਪਰਦਾ ਇਸ ਕਰਕੇ ਜਿਹੜੇ ਦੁਨੱਬੇ ਅਸੀਂ ਚੜਾ ਵੇਖ ਹਾਂ ਤੇ ਜੋ ਵੀ ਕੁਝ ਕਰਦੇ ਹਾਂ ਇਹਦੇ ਨਾਲ ਪਰਮੇਸ਼ਰ ਨੇ ਕੋਸ਼ਿਸ਼ ਕੀਤਾ ਜਾਸਤ ਸਾਰੀ ਧੰਕੀ ਹੈ ਪਰਮੇਸ਼ਰ ਦੀ ਉਹ ਕੀ ਗੰਤਾਂ ਨਾ ਕਦਾ ਬੁੱਲ नहीं ਪੈ सकता ਹਾਂ ਇਹਨਾਂ ਕਹੇ ਕੋ ਵੀ ਅਸੀਂ ਕਹਿੰਦੇ ਮੈਂ ਕੀਤਾ ਫਿਰ ਫਿਰ ਉਲਟਾ ਹੈ ਨਾ ਮੈਂ ਕੀਤਾ ਤੇਰੇ ਵਾਸਤੇ ਕੀਤਾ ਤੇਰੇ ਲੋਤੇ ਕੀਤਾ ਬਦਕਾ ਨਾਂ ਬੇਰੀ ਚੀਜ਼ ਹੈ ਚੀਜ਼ ਮਰਕਦੀ ਹੈ ਜੀਦੇ ਤੇ ਆਨ ਕਾ ਤੇ ਜੀਤ ਹੋਦੀ ਹੋਵੇ ਹਾਂ ਜੀ ਬ੍ਰਹਮ ਗਿਆਨੀ ਕਾ ਕੌਣ ਜਾਣੇ ਪੇ ਜੋ ਪੁੰਨ ਪੈ ਗਿਆ ਨਾ ਕੋਲ ਨਾ ਨਾਲ ਕਿ ਹੁੰਦਾ ਬੰਦੀਆ ਹਾਂ ਬਰਾ ਮਗੰਦੀ ਕਾ ਕੌਣ ਜਾਣੇ ਭੇਜ ਪ੍ਰਮਖਾਨੇ ਕਾ ਕੌਣ ਜਾਣੇ ਭੇਜ ਪ੍ਰਮਖਾਨੇ ਦੇ ਬੱਚਾ ਹੋਰ ਕੁਝ ਕਿੰਨਾ ਤਾਂ ਗਿਆ ਕਿ ਜਾ ਕੇ ਉਹ ਆਪਣੇ ਆਪਣਾ ਭੇਜਦਾ ਪੇ ਜਾਂਦਾ ਹੈ ਅਧੂਆ ਹੋਰ ਕੋਈ ਨਹੀਂ ਆਂਦਾ ਉਦੋਂ ਕੱਟ ਉਦੋਂ ਕੱਟ ਜਿਹੜਾ ਹੈ ਅ ਬ੍ਰਹਮ ਗਿਆਨੀ ਨੂੰ ਸਦਾ ਆਦੇਸ਼ ਆਪਕਮ ਗਿਆਨੀ ਤੋਂ ਕਮ ਜਾਣੇ ਦਾ ਕੌਣ ਜਾਣੇ ਭੇਦ ਭੇਦ ਕੋਈ ਭੇਦ ਨਹੀਂ ਜਾਣਦਾ ਕੌਣ ਜਾਣੇ ਭੇਦ ਕੋਈ ਨਹੀਂ ਜਾਣਦਾ ਇਸ ਕਰਕੇ ਬ੍ਰਹਮ ਗਿਆਨੀ ਨੂੰ ਸਦਾ ਆਦੇਸ਼ ਹੀ ਕਰਨਾ ਪੈਂਦਾ ਜਿਹਦਾ ਭੇਦ ਨਹੀਂ ਆਦੇਸ਼ ਉਹਦੇ ਦੇ ਇਹ ਬਿਸ਼ਾਰੇ ਕਿ ਕੋਈ ਕੋਈ ਨਹੀਂ ਜਾਂਦਾ ਨਹੀਂ ਉਹਦੇ ਅੱਗੇ ਤੁਸੀਂ ਹਾਰ ਮੰਨ ਲਓ ਹਾਰ ਮੰਨ ਲਓ ਕਿਸੇ ਕੋਈ ਪਾਇਆ ਨਹੀਂ ਲਾਸਿਰ ਹਾਂ ਜ੍ਰਮ ਗਿਆਨੀ ਕਾ ਕਥਿਆ ਨਾ ਜਾਇ ਅਧਾਖਰ ਜਬ ਬ੍ਰਹਮ ਗਿਆਨੀ ਬਾਰੇ ਕਥਨ ਕਰ ਲਿਖੇ ਤਾਂ ਦੋ ਅ ਤੋਂ ਬ੍ਰਹਮ ਗਿਆਨੀ ਬਣੇ ਬ੍ਰਹਮ ਕਲਸ ਗਿਆਨੀ ਬ੍ਰਹਮ ਕਲਸ ਕਿਹਾ ਕੁੱਲੀ ਕੱਖਰ ਬੰਗਿਆ अदे का कथन करिए जे ब्रह्मदा होई दी कह्या जा सकदा क्युकी ब्रह्मदै कथन है सारी सारे गुरुवाणी सारे भेद ब्रह्मदै कथन है पर ज्ञान न है, है। ब्रह्मदा का कथन ही नहीं कीता जा सकदा ब्रह्मदै ज्ञान का कथन कर बात भी कर। ब्रह्मते ज्ञान का कथन करना भेद जाना है ਰਾਮਾਪਤ ਲਾਸੋ ਦੇ ਗਿਆਨ ਦਾ ਪੇਜਾਨਾ ਇਹ ਤਾਂ ਉਹ ਕਥਨ ਕਰ ਲੈਣ ਦਾ ਪੇਜਾਨਾ ਉਹਦੇ ਗਿਆਨ ਦੀ ਜੇ ਪੂਰੀ ਸਾਨੂੰ ਨੌਲੇਜ ਉਤਾਈ ਅਸਾਂ ਕੋਈ ਗਿਆਨਵਾਰੀ ਉਹ ਤੋਂ ਬੱਦ ਵਾਲਾ ਹੀ ਘੱਟ ਗਿਆਨ ਵਾਲੇ ਦਾ ਜਾਂ ਤਾਂ ਬਰਾਬਰ ਦਾ ਹੈ ਬੱਦ ਵਾਲਾ ਉਹਦੇ ਉਹਦਾ ਪੇਜਾਨਾ ਜਾਂ ਜਾਂ ਤਾਂ ਉਹ ਬੱਦ ਨੂੰ ਪਿਆਰ ਨਾਲ ਹੋਵੇ ਜਾਂ ਫਿਰ ਕੋਈ ਬਰਾਬਰ ਦਾ ਤਾਂ ਹੋਵੇ ਕੋਈ ਪੇਜਾਨਾ ਜੋ ਇੰਕਾਰਾ ਬ੍ਰह्म ਕਰਨੇ ਦੀ ਗੱਤ ਬ੍ਰह्म ਨਹੀਂ ਕਰਦਾ ਬਰਾਬਰ ਦਾ ਹੋਵੇ ਉਹ ਜਾਣਦਾ ਹੈ ਜਾਂ ਫਿਰ ਉਹ ਆਪੇ ਜਾਣਦਾ ਕੋਈ ਨਹੀਂ ਕੋ ਜਾਣਦਾ ਜਾਂ ਉਹ ਤੋਂ ਵੱਧ ਹੋਵੇ ਉਸ ਤੋਂ ਵੱਧ ਹੋਏ ਹੈ ਜੀ ਸਾਡੇ ਕੋਲ ਡਿਗਰੀ ਉਹ ਨਹੀਂ ਹੈ ਬ੍ਰह्म ਗਿਆਨੀ ਵੱਡੀ ਕੋਈ ਡਿਗਰੀ ਕੋਈ ਹਾਲੇ ਤੱਕ ਇਦਾਂ ਮੰਨ ਲਓ ਤੋਂ ਬਾਅਦ ਕੋਈ ਹੈ ਹੀ ਨਹੀਂ ਡਿਗਰੀ ਨਹੀਂ ਹੈ ਜੀ ਬ੍ਰह्म ਗਿਆਨੀ ਕਾ ਨਾ ਜਾਏ ਅਤਾਖਰ ਅਤਾਖਰ ਬ੍ਰह्म ਅਤਕ ਇਹ ਬ੍ਰਹਮ ਬ੍ਰਹਮ ਨੂੰ ਕਥਨ ਕਰਨਾਂ ਲੱਗਿਆ ਹੈ ਬ੍ਰਹਮ ਦੀ ਉਹ ਇੱਕ ਕਥਾ ਅਥ ਕਥਾ ਬਣਨ ਦੀ ਹੈ ਬ੍ਰਹਮ ਨੇ ਕਥਾ ਹੈ ਸਾਰੀ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਬ੍ਰਹਮ ਨਹੀਂ ਕੋਈ ਤੇਹੀ ਤਰਫ ਕੀ ਤੈਥਾ ਦਾ ਤੇਹੀ ਨੇ ਇਹ ਕਹਾ ਬੁੜੀ ਹੋਈ ਜੀ ਜੇ ਤਾਂ ਬ੍ਰਹਮ ਨੇ ਹੋ ਰਿਹਾ ਗਿਆਨੀ ਦਾ ਜੋ ਬਾਹਰ ब्रह्माणी कथो न हो धरदा ज्ञानी दा जो वहां पे होर अधाखर रब दी कसम ते बहार है ब्रह्मा ज्ञानी सर्व का ठाकुर ब्रह्मा ज्ञानी सर्व का ठाकुर जिन्ने भी ठाकुर बनाए हो ने देवी देवते बनाए हो ने का भी बनाए हो उजड़ ने वो बड़ा ठाकुर उजड़ यहां पर ठाकुर उजड़ा ਹਾ ਕੋਲ ਲਾਉਂਦਾ ਹੈ ਅਰਥਿਕ ਤੇ ਇਹ ਸਰਬਕਾਠਾ ਕਰੋ ਜਿੰਨੇ ਵੀ ਹੋਠ ਆਸਲ ਨੇ ਬਨੇ ਹੋਏ ਸਾਡੇ ਤੇ ਵੀ ਦੇਖਦੇ ਉਹਨਾਂ ਸਾਜਾ ਤੋਂ ਪਰ ਹਾਂ ਬ੍ਰह्मज्ञानी ਕੀ ਮਿੱਤਰ ਕੌਣ ਬਖਾਨੇ ਬ੍ਰह्मज्ञानी ਦੇ ਮਨ ਵਿੱਚ ਕਿ ਕੋਈ ਪਤਾ ਨਹੀਂ ਸਾਨੂੰ ਉਹਦਾ ਅਗਲਾ ਹੁਕਮ ਕੀ ਹੈ ਕੋਈ ਪਤਾ ਨਹੀਂ ਸਾਨੂੰ ਦੂਵੇ ਸਾਦਾ ਪਤਾ ਨਹੀਂ ਹੋਣਾ ਹੁਣ ਦੇਣਾ ਹੈ ਦੂਵੇ ਸਾਦਾ ਹੁਕਮ ਕਰਨਾ ਤੇ ਨਹੀਂ ਕਰਨਾ ਇਹ ਵੀ ਨਹੀਂ ਪਤਾ ਹੋਏ ਸਾਨੂੰ ਤੇ ਫਿਰ ਕੋਣ ਨੂੰ ਦੱਸਣਾ ਅਗਲਾ ਸਾ ਆਵੇ ਕੇ ਨਾ ਆਵੇ ਸਾਦਾ ਹੁਕਮ ਨਾ ਹੋਵੇ ਜਿਵੇਂ ਇਹ ਹੀ ਕਹਤਾ ਵੀ ਅਗਲਾ ਸਾ ਬੰਦ ਜਦੇ ਪਤਾ ਲੱਗਣਾ ਉਹ ਬਾਅਦ ਚ ਪਤਾ ਲੱਗੂ ਤੇ ਮਾਂ ਚ ਕੀ ਹੈ ਹੁਣ ਇੱਕ ਤਾਂ ਸਾਹਿਬ ਪਹਿਲਾਂ ਨਹੀਂ ਲੱਗਦਾ ਪਤਾ ਕੀ ਹੈ ਬਾਤੋਂ ਨੇ ਦੱਸੇ ਦਿੱਤਾ ਬਾਤੋਂ ਨੇ ਦੱਸੇ ਕੀ ਹੈ ਜੋ ਬਾਬਰ ਗਿਆ ਤਾਂ ਦੱਸੇ ਦਿੱਤਾ ਦੱਸੇ ਕੋਈ ਗਿਆਨੀ ਕੀ ਗਿਆਨੀ ਗਿਆਨ ਬ੍ਰਹਮ ਗਿਆਨੀ ਦੀ ਤਾਂ ਅਵਸਥਾ ਜਾਣਦਾ ਕਿਆ ਬੋਲਦਾ ਜਦੋਂ ਪਤਾ ਲੱਗਦਾ ਹੁਕਮ ਤਾਂ ਬੁੱਝ ਹੁੰਦਾ ਠੀਕ ਜੋ ਵਾਪਸ ਜਾਂਦਾ ਜੋ ਵਰਤੇ ਉਹ ਜੋ ਵਰਤ ਕੇ ਉਹ ਤੇਰਾ ਪਾਵੇ ਇਹ ਹੀ ਸੀ ਤੇਰੀ ਗੋਤੀ ਮੈਂ ਬ੍ਰਹਮ ਗਿਆਨੀ ਦਾ ਅੰਤ ਨਾ ਪਾੜ ਬ੍ਰਹਮ ਗਿਆਨੀ ਉਹਦਾ ਨਾ ਕਦੇ ਮਰਦਾ ਹੋ ਨਾ ਹੌਦਿਕਾਂ ਦਾ ਕੋਈ ਲਾਭ ਹੋ ਸਕਦਾ ਕਿੱਥੇ ਤੱਕ ਕੋਈ ਸੋਚ ਹੈ किदी न ब्यूटी दृष्टि है किदाले माहौल का विचार है सब कुछ निदर्शो मानक ब्रह्म ज्ञानी सबसे आदि है नाम ब्रह्मचारी ब्रह्मता है पूर्ण ब्रह्म यादी ये शब्द वो ज्ञान अवस्था वाले पद को सुनता ज्ञानो का ਪੂਰਨ ਬ੍ਰਹਮ ਦਾ ਬ੍ਰਹਮ ਉਹਦੇ ਬਾਅਦ ਜਿਹੜਾ ਆਉਂਦਾ ਹੈ ਗਿਆਨ ਦੇਣ ਦੀ ਇੱਛਾ ਲੋਕਾਂ ਦੇਚਿਆ ਗਿਆ ਗੁਰੂ ਵਾਲਾ ਪੱਖ ਜਿਹੜਾ ਉਹਨੂੰ ਦੂਜਾ ਗੁਰੂ ਵਾਲਾ ਪੱਖ ਦਾ ਕੀ ਦੱਸਣਾ ਬ੍ਰਹਮ ਵਾਲਾ ਪੱਖ ਨਹੀਂ ਦੱਸਣਾ ਉਹਦੀ ਇੱਛਾ ਨਮ ਗਿਆਨਿਕ ਬ੍ਰਹਮ ਗਿਆਨੀ ਦਾ ਅੰਤਨਾ ਪਾਰ ਬ੍ਰਹਮ ਗਿਆਨੀ ਦਾ ਨਾਂ ਅੰਤ ਨਾ ਪਾਰ ਪਾਲਤ ਸਰਬੇਪੀਏ ਪਰ ਉਦਾਨਸ ਪਰ ਕਿਥੇ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਇਸ ਘਰ ਕੇ ਨਾਮ ਹੈ ਕਹਦਾ ਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਹੈ ਆ ਵਾਜਬ ਅੱਗੇ ਜੋ ਫਰਾਈਂ ਜਾਇਜ਼ ਹੈ ਨਮਸਕਾਰ ਹੈ ਉਨ ਕਦੀ ਜੋਗਾ ਹਾਂਜੀ